ਅਰੰਭੇਤ ਪਗਤ ਪੰਡਾਰਹ ਗੁਰ ਸਤ ਪਾਸੇ ਰਾਮ ਰਾਜ ਗੁਰ ਸਤ ਗੁਰ ਸੱਚਾ ਹੈ ਸਿੱਖ ਦੇ ਹਰ ਸੇ ਰਾਮ ਰਾਜ ਤਨ ਤਨ ਵਨ ਜਾਰਾਵਨ ਜ ਗੁਰ ਸਾਹ ਸਬਾਸੇ ਰਾਜ ਜਾਨਕ ਗੁਰ ਤਿੰਨੀ ਪਾਇਆ ਜਨ ਤਰ ਲਿਖਤ ਲੋਕ ਪਹਲਾ ਪਹਿਲਾ ਪਰ ਪਰਕੜੀ ਲਦੀਆ ਪਰ ਪਰ ਪਰਿਆ ਸਾਥ ਪਰ ਖਾਤ ਪੜੀ ਹੱਜ ਤੇ ਵਰ ਸੁਪੜੀਆ ਜੇਤੇ ਮਾਸ ਪੜੀਆ ਜੀਤੀ ਆਰ ਜਾ ਪੜੀਆ ਜੇਤੇ ਸਾਸ ਨਾਨ ਕਲੇਖਾ ਇਹ ਗਲ ਹੋਰ ਹਮੈ ਚਖਣਾ ਮਹੱਲਾ ਪਹਿਲਾ ਲਿਖ ਲੇਕ ਤੇਤਾ ਕੜਿਆ ਬਹੁਤ ਹੀਤ ਪਵਿਆ ਤੇਤੋ ਲਵਿਆ ਬੋਪੇ ਕੀ ਆ ਦੇਹ ਦੁਖ ਦੀਆ ਸਹਗੀ ਜੀਆ ਆਪੜਾ ਕੀਆ ਅੰਦਨਾ ਖਾਇਆ ਸਾਰ ਦੁਆਇਆ ਬੁੱਧ ਖਾਇਆ ਦੁਜਾ ਪਾਇਆ ਬਸ ਨ ਪਹਿਰੈ ਮੂਨ ਵਿੱਚ ਉਤਾ ਕਿਉ ਸੁੱਤਾ ਪਗੂ ਤੇ ਤਾਣਾ ਆਪਣਾ ਕੀਆ ਕਮਾਣਾਲ ਮਲਕੀ ਸਚਾਈ ਭਾਈ ਮੁਰਖ ਨਾ ਪਤ ਗਵਾਈ ਵਿਰਨਾਵੇ ਕਿਸਥਾ ਨਪਾਈ ਰਹੇ ਬੇਵਾਨੀ ਮੜੀ ਵਸਾਣੀ ਆਂਦ ਨਾ ਜਾਣਾ ਫਿਰ ਪਿਛਤਾਣੀ ਸਤਗੁਰੂ ਪੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨੰਗ ਕਰੇ ਸੋ ਪਾਏ ਆ ਸੰਦੇਸੇ ਤਿਨਹਿ ਕੇਵਲ ਹੋ ਮਸਬਦ ਜਲਾਏ ਪੜੀ ਵਾ ਵਾ ਕੀਰਤ ਗਾਉ ਦੇ ਨਾਨਕ ਰਮਾ ਵਾ ਵਾ ਆਪਣਾ ਅਣਹੋਦਾ ਵਾ ਵਾ ਆਪ ਘਨਾਏ ਦੇ ਹੌਟਾ ਦੀ ਕੰਨੀ ਜਾ ਹੋਰੀ ਉੱਤਮ ਵਾ ਵਾ ਜਾਤ ਸਦਾਏ ਦੇ ਤਨ ਮੰਗਾ ਜਵਾ ਵਾ ਵਾ ਤੁਜਿਆ ਤੇ ਆਏ ਦੇ ਤੁਹਦ ਤਾਲ ਦੇ ਕਮੂ ਨਾ ਵਿਚ ਨਾ ਬਣਾ ਨ ਹੋ ਦਾ ਆਗਣਾਏ ਦੇ ਹੋਡਾ ਦੀ ਕੰਦੀ ਇਜਾਤ ਹੋਰ ਤੁਮ ਜਸ ਦੇ ਤਨ ਮੰਗਾ ਜੇ ਤੁਜਾ ਤੇ ਹਾਏ ਦੇ ਸਭ ਪਾण्डे ਤੁਦ ਸਾਜਿਆ ਵਾ ਵਾ ਵਿੱਚ ਵਸ ਹਰ ਥਾਰਾ ਜੋ ਪਾਵਹਿ ਪਾण्डे ਵਿੱਚ ਵਸ ਸੋ ਨਿਕਲਿਆ ਕਿਆ ਕੋਈ ਕਰੇ ਨਾਨਕ ਕਉ ਹਰ ਬਖਸਿਆ ਵਾ ਵਾ ਹਰ ਭਗਤ ਪੰਡਾਰਾ RAM RAJ JI MEHWARI RAM ਸ਼ਲੋਕ ਮਹਲਾ ਪਹਿਲਾ ਕੂੜ ਰਾਜਾ ਕੂੜ ਪਰ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾ ਕੂੜ ਸੋਇਨਾ ਕੂੜ ਰੂਪਾ ਕੂੜ ਪੰਦਰ ਹਾ ਕੂੜ ਕਾਇਆ ਕੂੜ ਪਾ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾੜ ਕੂੜ ਕੁੜਾ ਨੇ ਹੁ ਲਗਾਵੇ ਸੜਾ ਕਰਤਾ ਵਾਜ ਗੁਰੂ ਮਹਲਾ ਪਹਿਲਾ ਸਚਤਾ ਪਰਜਾਨੀਆ ਸਚਤਾ ਪਰਜਾਨੀਆ ਜਰ ਦਾ ਸਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਅਛਾ ਤੋ ਸਚਤਾ ਪਰਜਾਨੀਆ ਜਾ ਸਚ ਤੇਰੇ ਪਿਆਰ ਦਾ ਉਸ ਮਹਾਰਾਸੀ ਦਾ ਪਾਏ ਬੁਦਦੁਆ ਪਰਜਾਨੀਆ ਜਜੁਗਤ ਜਾਣਾ ਜੀ ਤਰਤ ਕਾਇ ਸਾਦਕ ਵਿੱਚ ਦੇ ਘਰ ਤਬੀ ਸਚਤਾ ਪਰ ਜਾਣੀ ਹੈ ਜਾ ਸਿਕ ਜੀ ਕੀ ਕਰੇ ਸਚਤਾ ਪਰ ਜਾਣੀ ਹੈ ਜਾ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿਰਾ ਕਰੇ ਨਿਵਾਸ ਸੱਚ ਸੁਵਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣਾ ਬੇਨਤੀ ਜੇ ਸੱਚ ਭੱਲੇ ਹੋਏ ਪੜੀ ਨਾਮ ਹੈ ਨਤਲੀਖਾ ਜੇ ਮਿਲਤਾ ਵਾ ਜੇ ਵੇਹੀ ਵਾ ਵਾ ਵਾ ਕਾਰ ਕਮਾਈ ਐ ਜੇ ਹੋਇ ਪੂਰਬ ਲਿਖਿਆ ਤਾਂ ਧੂਡ ਵਾ ਵਾ ਵਾ ਦੀ ਪਾਈ ਐ ਮਤ ਥੋੜੀ ਵਾ ਵਾ ਵਾ ਸੇਵ ਗਵਾਈ ਐ ਹਉ ਵਾਰਿਆ ਤੇ ਜੇ ਅੱਜ ਮਿਲਿਆ ਤਾਂ ਮਸਤਕ ਲਾਈਆ ਗੂੜਾ ਲਾਲ ਛੱਟਿਆ ਹੋਏ ਇੱਕ ਮਨ ਅਲਕ ਧਾਈ ਹੈ ਫਾਲਤੇ ਵੇਹ ਪਾਈ ਹੈ ਜਿਵੇਂ ਹੀ ਗਾਰ ਕਮਾਈ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਧੂਪ ਦਿਨਾਂ ਦੀ ਪਾਈ ਹੈ ਮੈਂ ਥੋੜੀ ਸੇਵਗਾਈ ਹੈ